ਹੇ ਲੋਕ ਮਹੱਲਾ ਤੀਜਾ ਬਿਨ ਕਰਮੈ ਨਾਉ ਨ ਪਾਈਐ ਪੂਰੇ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਤਾਂ ਗੁਰਮਤ ਮੇਲ ਮਿਲਾਏ ਕਰਮ ਦਾ ਅਰਥ ਅਸੀਂ ਕਿਰਤਾਂ ਕਰਾਂਗੇ ਪੂਰੇ ਕਰਮ ਪਾਇਆ ਜਾਏ ਨਾਮ ਦੀ ਪ੍ਰਾਪਤੀ ਪੂਰੇ ਕਰਮ ਦੀ ਪਛਾਣ ਹੈ ਹੈ ਪੂਰੀ ਕਰਤਾ ਹੋ ਜਵੇ ਤਾਂ ਨਾਮ ਰਵੇ ਮਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤਿ ਮੇਲ ਮਿਲਾਏ। ਮਾਨ ਕਹਿੰਦਾ ਜੇ ਆਪਣੀ ਨਦਰ ਕਰੇ ਪਰਮੇਸ਼ਰ ਉਹ ਕਿਰਪਾ ਹੀ ਹੈ ਜਿਹੜੀ ਮੇਲ ਮਿਲਾਉਂਦੀ ਹੈ। ਗੁਰਮਤਿ ਮੇਲ ਮਿਲਾਏ। ਤਾਂ ਗੁਰਮਤਿ ਦੀ ਪ੍ਰਾਪਤੀ ਹੁੰਦੀ ਮਿਲਦੀ ਹੈ। ਗੁਰਮਤ ਨਾਲ ਮੇਲ ਮਿਲ ਜਾਂਦਾ ਹੈ। ਹੋ ਜਾਂਦੀ ਹੈ। ਮਾਨ ਅਰਚਿਤ ਦੀ ਇੱਕਤਾ ਹੋਣੀ ਬਹੁਤ ਬੜੀ ਪ੍ਰਾਪਤੀ। ਜਦੋਂ ਇੱਕ ਆਪ ਇੱਕ ਹੋ ਜਾਵੋ। ਤੇ ਵੱਡੀ ਕੋਈ ਪ੍ਰਾਪਤੀ ਨਹੀਂ ਹੈ ਸੰਸਾਰ। ਉਸੇ ਬਾਦ ਨਾ ਲੈ ਲੈ ਲੈ ਮਹੱਲਾ ਪਹਿਲਾ ਇੱਕ ਦੰਜ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਹੈ ਉਹ ਸੱਟੀਆਂ ਇੱਕ ਪੀ ਫਿਰ ਹੱਸਣ ਪਾਹ ਨਾ ਸਰੀਰ ਆਦਮੀ ਛੱਡ ਜਾਂਦਾ ਇਹਨੂੰ ਸਾੜ ਦਿੰਦੇ ਨੇ ਦੱਜਾ ਇੱਕ ਥੱਲੇ ਦਬ ਦਿੰਦੇ ਨੇ ਮੁਸਲਮਾਨ ਜਿੰਨੇ ਦੱਬ ਦਿੰਦੇ ਨੇ ਸਾਈ ਦਵਾ ਦਿੰਦੇ ਨੇ ਕਬਰ 'ਚ ਉਹ ਸਾੜਦੇ ਨਹੀਂ ਹਣ ਉਹਨਾਂ ਦੀ માનਤਾ ਹੋ ਹੈ ਸਾੜਨ ਵਾਲਿਆਂ ਦੀ માનਤਾ ਹੋ ਹੈ ਇਹ ਕਿੱਦਾਂ ਇਤਨਾ ਕੁੱਤੇ ਖਾਣੇ ਇੱਕ ਹੈਗੇ ਲੋਕ ਨੇ ਉਹ ਕਹਿੰਦੇ ਨਾ ਢੱਕੋ ਨਾ ਇਹਨੂੰ ਸਾੜੋ ਨੂੰ ਖਵਾ ਦਿਓ ਉਹ ਭੁੱਖਾਂ ਨਾਲ ਹੀ ਦੂਰ ਹੋ ਜੂਗੀ ਆਪਣੀ ਆਪਣੀ ਖਿਆਲ ਲੋਕਾਂ ਦੀ ਇੱਕ ਪਾਣੀ ਵਿੱਚ ਸੁੱਟੀਆਂ ਇੱਕ ਪਾਣੀ ਵਿੱਚ ਸੁੱਟ ਦਿੰਦੇ ਨੇ ਵੀ ਜਲਦੀ ਜੀਵ ਖਾ ਲੈਣਗੇ ਭਾਈ ਉਹ ਉਹਨਾਂ ਦਾ ਖਿਆਲ ਹੈ ਆਪਣਾ ਤੇ ਆਪਣੇ ਆਪਣੇ ਖਿਆਲ ਕੁਝ ਲੋਕ ਐਸੇ ਨੇ ਇੱਕ ਸਾ ਵੀ ਫਿਰਕਾ ਜਿਹੜਾ ਹੱਸ ਇੱਕ ਵੀ ਫਿਰ ਹਸਣ ਪਾਏ ਇਹ ਕਰਦੇ ਨੇ ਜਦ ਮਰ ਜਾਂਦਾ ਬੜਾ ਹਾਸਾ ਕਰਦੇ ਨੇ ਬੜਾ ਹਾਸਾ ਨੂੰ ਖੁਸ਼ੀ ਮਨਾਉਂਦੇ ਨੇ ਬਈ ਸਰੀਰ ਛੱਡ ਗਿਆ ਆਪਣੇ ਘਰ ਤੇ ਲੈ ਗਿਆ ਵਧੀਆ ਹੋਇਆ ਸੰਸਾਰ ਦੇ ਮੁਕਤ ਹੋ ਗਿਆ ਇਹ ਅਲੱਗ-ਅਲੱਗ ਲੋਕਾਂ ਦੇ ਖਿਆਲ ਫਿਰ ਹੱਸਣ ਪਾਹੇ ਅਰਥ ਐ ਹੋਏ ਹੋਏ ਆ ਕਿ ਕਈ ਫਿਰ ਸੁੱਕੇ ਖੂਬ ਵਿੱਚ ਪਾਏ ਜਾਂਦੇ ਹਨ ਇਹ ਤਾਂ ਨਹੀਂ ਭਾਵ ਬਣਦਾ ਜੀ ਹੱਸਣ ਪਾਹੇ ਲਿਖਿਆ ਹੋਇਆ ਹੱਸਦੇ ਨੇ ਸੁੱਕਾ ਖੂਬ ਇੱਥੇ ਤਾਂ ਹੈ ਨਹੀਂ ਮੇਰੇ ਕੋਲ ਅਰਥ ਕਰਨ ਲੱਗੇ ਜਿਹੜੇ ਆਮ ਅਰਥ ਹੈ ਪਰ ਚਾਲੇ ਤੋਂ ਕਹਿੰਦੇ ਵੀ ਸੁੱਕੇ ਖੂਜ ਪਾ ਦਿੰਨੇ ਉਹਨਾਂ ਨੂੰ ਉਹਨਾਂ ਦਾ ਹੀ ਅੰਦਾਜ਼ਾ ਹੈ ਉਹਨਾਂ ਨਾਲ ਅੰਦਾਜ਼ਾ ਹੋਊ ਹੁਣ ਮੈਂ ਤਾਂ ਹੱਥਣ ਪਾਇਵੇ ਅਰਥ ਇਹ ਮਗਰੋਂ ਇੱਕ ਮਨੁੱਖ ਸਾੜੇ ਜਾਂਦੇ ਹਨ ਇੱਕ ਦੱਬੇ ਦਫਨਾਏ ਜਾਂਦੇ ਹਨ ਇੱਕਨਾਂ ਨੂੰ ਕੁੱਤੇ ਖਾਂਦੇ ਹਨ ਕਈ ਵਿਸ਼ੇਸ਼ ਤੌਰ ਤੇ ਪਾਣੀ ਵਿੱਚ ਛੁੱਟੇ ਜਾਂਦੇ ਹਨ ਕਈ ਫਿਰ ਸੁੱਕੇ ਖੂਹ ਵਿੱਚ ਪਾਏ ਜਾਂਦੇ ਹਨ ਉਹ ਮਰੇ ਖੂਹ ਮਿਲਣੇ ਤਦ ਹੀ ਇਹ ਸੁੱਕਾ ਤੇ ਹੁੰਦਾ ਹੀ ਨਹੀਂ ਕੋਈ ਤਾਂ ਖੂਹ ਰਿਹਾ ਵੀ ਜਿਹੜਾ ਜੀਵਾਤਮਾ ਜਾ ਕੇ ਕਿੱਥੇ ਸਮਾਉਂਦੀ ਹੈ ਉਹਦਾ ਟਿਕਾਣਾ ਕਿਹਾਂ ਕੀ ਹੈ ਕਿਹਾਂ ਕੀ ਸਮਾਗੀ ਜਾ ਕੇ ਇਹ ਕੋਈ ਨਹੀਂ ਦੱਸ ਰਿਹਾ ਜੋ ਕੁਝ ਕਰ ਰਹੇ ਨੇ ਬਿਹੇਵ ਉਹ ਉਹ ਡੈਡ ਬੋਡੀ ਨਾ ਕਰ ਰਹੇ ਆਤਮਾ ਭਲਾ ਹੋ ਜੀਉ ਸਰੀਰ ਨੂੰ ਐ ਕਰ ਲੰਦੇ ਤੇ ਆਤਮਾ ਭਲਾ ਸਰੀਰ ਨੂੰ ਐ ਕਰ ਲੰਦੇ ਤੇ ਆਤਮਾ ਭਲਾ ਆਤਮਾ ਜਾ ਕੇ ਭਲਾ ਹੋ ਕਿੱਥੇ ਸਮਾਊ ਇਹ ਕੋਈ ਨਹੀਂ ਦੱਸ ਰਿਹਾ ਕਿਵੇਂ ਉਹਦਾ ਭਲਾ ਹੋਊਗਾ ਕਿਉਂ ਐ ਕਰਦੇ ਤੇ ਭਲਾ ਹੁੰਦਾ ਜਿਉਂ ਐ ਕਰਦੇ ਤੇ ਨਹੀਂ ਹੁੰਦਾ ਇਹਦਾ ਕੋਈ ਫਰਕ ਨਹੀਂ ਕਰ ਰਿਹਾ ਕੋਈ ਸਮਝ ਆ ਨਹੀਂ ਰਹੀ ਹੱਦ ਤੱਕ ਇਸ ਗੱਲ ਦਾ ਫਲੇਖਾ ਵੀ ਆਪਾਂ ਹੁਣ ਦੂਰ ਕਰ ਲੈਣੇ ਆ ਨਾਨਕ ਏਵਾਂ ਜਾਪਾਈ ਕਿੱਥੇ ਜਾਏ ਇਹ ਤਾਂ ਆਪ ਕਦੇ ਵੀ ਅਰਥ ਨਹੀਂ ਬਣਦੇ ਜੀ ਬਣ ਜਾਣਗੇ ਹੁਕਮ ਆਏ ਹੁਕਮੇ ਜਾਏ ਹੁਕਮੇ ਰਹੇ ਸਮਾਈ ਗੁਰੂ ਨਾਨਕ ਦਾ ਦੱਸ ਰਹੇ ਨੇ ਜਿੱਦਾਂ ਸਵਾਲ ਐ ਕਹਾਂ ਤੇ ਆਏ ਕਹਾਂ ਇਹ ਜਾਏ ਕਹਾਂ ਇਹ ਰਹੇ ਸਮਾਈ ਅੱਜ ਜੀ ਗੁਰੂ ਨਾਨਕ ਦੇਵ ਜੀ ਬੋਲਸ਼ਟ ਵਿੱਚ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਸਾਨੂੰ ਤਾਂ ਪਤਾ ਹੈ ਜੇ ਗੁਰਨਾਨਕ ਨੂੰ ਨਹੀਂ ਪਤਾ ਅਸਲ ਕਿਹਨਾ ਲੋਕਾਂ ਦੱਸਿਆ ਗੁਰਬਾਣੀ ਵਾਲੇ ਉਹਨਾਂ ਨੂੰ ਕੋਈ ਗਿਆਨ ਇਹ ਅਰਥ ਕਿ ਮੈਂ ਕਹਿਣਾ ਆ ਇਹ ਲੱਗਦਾ ਸ਼ਾਇਦ ਉਹ ਕਹਿਣਾ ਚਾਹੁੰਦੇ ਆ ਕਿ ਮੈਨੂੰ ਤਾਂ ਆਪ ਨਹੀਂ ਪਤਾ ਬੜੀ ਅਸਮਰਤਤਾ ਜ਼ਾਹਰ ਕਰ ਰਹੇ ਪੱਲੇ ਜਿਹੜੇ ਟੀਕਾ ਕਰ ਲੈ ਨੂੰ ਖੁਦ ਨੂੰ ਨਹੀਂ ਪਤਾ ਹਾਂਜੀ ਕੋ ਉਹਨਾਂ ਨੇ ਮੰਨ ਲਿਆ ਕਰਨਾ ਗੁਰੂ ਜੀ ਕਹਾ ਉਹਨਾਂ ਨੂੰ ਪਤਾ ਸੀ ਜੇ ਅੱਲ ਦੇ ਦੁਸ਼ਮਣ ਉਹ ਤੋਂ ਪਰਲੇ ਦੇ ਸਮਾਰ ਕੇ ਗੁਰਬਾਨੀ ਤੋਂ ਸਮਝ ਆ ਜਾਂਦਾ ਤਾਂ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਇਹ ਵੀ ਸੀ ਅਰਥ ਕਰਦੇ ਸੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਸਾਰੇ ਇੰਡੀਆ ਦਾ ਉਹਨਾਂ ਦੇਸ਼ਾਂ ਦਾ ਚੱਕਰ ਘਟਿਆ ਉਹਨਾਂ ਨੇ ਜਗਾ ਜਗਾ ਗਏ ਨੇ ਜਗਾ ਜਗਾ ਦੇ ਲੋਕ ਦੇਖੇ ਨੇ ਕੀ ਕਰਦੇ ਨੇ ਉਹ ਗੱਲ ਦੱਸੀ ਜਾਂਦਾ ਪਪਾ ਆਪ ਤਾਂ ਇਹ ਹੈ ਕਿ ਉਹ ਦੱਸ ਰਹੇ ਆ ਕਿ ਸਿਰਫ ਸਰੀਰ ਦਾ ਪੱਦਰ ਤੇ ਤਾਂ ਲੋਕ ਰੌਲਾ ਪਾਈ ਜਾਂਦੇ ਆ ਜਿਹੜੀ ਆਤਮਾ ਹੈ ਜਿਹੜਾ ਅਸਲੀ ਸਰੀਰ ਉਹ ਕਿੱਥੇ ਗਿਆ ਨਾਲ ਕੀ ਹੋ ਰਿਹਾ ਜੀ ਨਾਲ ਹੋਣਾ ਜੀ ਦੀ ਗੱਲ ਕੋਈ ਕਰਦਾ ਨਹੀਂ ਸਰੀਰ ਦੀ ਗੱਲ ਯਾਦ ਹੀ ਕਰੀ ਜਾਂਦੇ ਨੇ ਸਾਰੇ ਆ ਗੱਲ ਕਹਿ ਰਹੇ ਨੇ ਪੌੜੀ ਤਿੰਨ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖੀ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਜੋ ਨਾਮ ਹਰ ਰਾਤੇ ਜਿਹੜੇ ਆ ਲੋਭ ਨਾਲ ਅੰਡੇ ਹੋਏ ਨੇ ਉਹਨਾਂ ਦਾ ਸੰਸਾਰ ਚ ਖਾਣਾ ਪਹਿਣ ਔਰ ਉਹਨਾਂ ਦੀ ਮਾਇਆ ਸਾਰੀ ਪਵਿੱਤਰ ਹੋ ਜਾਂਦੀ ਹੈ ਕਿਉਂ ਉਹਨਾਂ ਨੂੰ ਪਤਾ ਨਹੀਂ ਕਿੱਥੇ ਅਸੀਂ ਖਰਚ ਕਰਨੀ ਹੈ ਮਾਇਆ ਕਿਵੇਂ ਕਰਨੀ ਹੈ ਕਿੱਥੇ ਨਹੀਂ ਕਰਨੀ ਤਾਂ ਫਤ ਬਿਤ ਹੋ ਜਾਂਦੀ ਹੈ ਉਹਨਾਂ ਕੋਲ ਗਿਆਨ ਹੈ ਉਹਨਾਂ ਕੋ ਨਾਮ ਹੈ ਉਹਨਾਂ ਦੀ ਮਾਇਆ ਵੀ ਸਫਲੀ ਹੋ ਜਾਂਦੀ ਹੈ ਇਸ ਤਰੀਕੇ ਨਾਲ ਖਰਚ ਕਰਦੇ ਨੇ ਜਿੱਥੇ ਕਰਨੀ ਹੈ ਉੱਥੇ ਕਰਨੀ ਹੈ ਜਿੱਥੇ ਨਹੀਂ ਕਰਨੀ ਉੱਥੇ ਨਹੀਂ ਕਰਨੀ ਉਹਨਾਂ ਨੂੰ ਸਮਝ ਹੈ ਜਿਹਨ ਕੇ ਕਾਰ ਮੰਦਰ ਮਹਿਲ ਥਰਾਈ ਸਭ ਤੋ ਹੈ ਉਹਨਾਂ ਦੀ ਸਰਾਵ ਮੰਦਰ ਮਹਿਲ ਘਾਰੇ ਸਾਰੇ ਤੋ ਨੇ ਚਾਹੇ ਉਹ ਘਰ ਕੇ ਰਹਿੰਦੇ ਨੇ ਚਾਹੇ ਮੰਦਰ ਚ ਰਹਿੰਦੇ ਨੇ ਚਾਹੇ ਰਾਜ ਚਲਾ ਰਹੇ ਨੇ ਚਾਹੇ ਉਹ ਸਭ ਤੋ ਹੈ ਕਿਉਂ ਜੇ ਨਾਮ ਦੇ ਰੰਮ ਜਿ ਰੰਗੇ ਹੋਏ ਨੇ ਤੋ ਬਿੱਤਰ ਹੈ ਜੇ ਜੋ ਗੁਰਮੁਖੀ ਸੇਵਕ ਸਿੱਖ ਅਬਿਆਗਤ ਜਾਏ ਕੋਈ ਜਿਹੜੇ ਆਪਣੇ ਮੁਸਾਫਰ ਦੀ ਰਾਤ ਕਟਾਉਂਦੇ ਨੇ ਪ੍ਰੇਮ ਕਰਦੇ ਨੇ ਜੇ ਰਾਤ ਪੈ ਜਾਂਦੀ ਹੈ ਕਹਿੰਦੇ ਨਾ ਆਓ ਜੀ ਸਾਡੇ ਥਨ ਪਾਦਨੇ ਜੇ ਤੁਸੀਂ ਆਏ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਦੇ ਗੁਰੂ ਮੰਦਰ ਸਭ ਸੁਖੀਤਰ ਹੋ ਜਾਂਦੇ ਨੇ ਜਿਹੜੇ ਇਹ ਜਿਹਾ ਕਰਦੇ ਇਹ ਜੋ ਨਾਮ ਹਰ ਰਾਤੇ ਉਹਨਾਂ ਵਾਸਤੇ ਇਹ ਗੱਲ ਚੱਲ ਰਹੀ ਹੈ ਜੀ ਹਾਂਜੀ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖੀ ਸਿੱਧ ਸਾਧ ਸੰਤ ਤੜ ਤੁਰੇ ਨੇ ਘੋੜੇ ਨੇ ਘੋੜੇ ਨੇ ਖੁਰਗੀ ਇਹਨੇ ਸਭ ਪਵਿੱਤਰ ਨੇ ਜੀਨ ਕੀ ਹੁੰਦਾ ਜੀ ਜੀਨ ਉੱਤੇ ਪਾਇਆ ਹੁੰਦਾ ਕਾਠੀ ਉਹਦੇ ਤੇ ਬਹੁਤ ਕੀਮਤੀ ਘੋੜੇ ਦੇ ਉੱਤੇ ਅੱਛਾ ਜੀ ਸ਼ਾਹੀ ਪੋਸ਼ਾਕ ਪਾ ਕੇ ਘੋੜੇ ਦੇ ਉੱਤੇ ਕਾਠੀ ਟੋਲੀ ਜਰੀ ਵੀ ਕੱਢੀ ਹੋਈ ਠਾ ਜਾ ਕੇ ਘੋੜੇ ਨੂੰ ਫੇਰ ਉੱਤੇ ਬਿਠਾ ਲ ਨਾ ਕਿਸੇ ਸਾਧ ਸੰਤ ਨਵੀਂ ਲੰਗਰ ਦੇ ਸੰਤਾਂ ਨੂੰ ਕਹਿੰਦੇ ਪਹਿਲਾਂ ਜੀ ਤੁਸੀਂ ਇਹਦੇ ਚੱਕ ਪਾਓ ਕਾਰ ਤੇ ਇਹੋ ਜਿਹਾ ਸਿੱਖ ਸਾਧ ਸੰਤ ਚੜ ਜਿਨ੍ਹਾਂ ਤੇ ਗੁਰਸਿੱਖ ਸਾਧ ਸੰਤ ਨੂੰ ਸਵਾਰੀ ਕਰਾ ਕੇ ਉਹਨਾਂ ਛੱਡ ਕੇ ਉਹਨੇ ਇਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲਣ ਹਰ ਹਰ ਰਾਮ ਨਾਮ ਹਰ ਸਤ ਜਿਨ੍ਹਾਂ ਦੇ ਇਨਕੇ ਕਰਮ ਧਰਮ ਕਾਰਜ ਸਭ ਪਵਿੱਤ ਹਨ ਉਹ ਜੋ ਵੀ ਕਰਮ ਧਰਮ ਕਰਦੇ ਨੇ ਕਾਰਜ ਕਰਦੇ ਨੇ ਉਹਨਾਂ ਦੇ ਕਾਰਜ ਕਰਮ ਧਰਮ ਵੀ ਪਵਿੱਤਰ ਹੋ ਜਾਂਦੇ ਨੇ ਕੱਲੇ ਕਰਮ ਧਰਮ ਪਵਿੱਤਰ ਨਹੀਂ ਜੋ ਬੋਲਣ ਤਬੇ ਤਾਂ ਹਰ ਹਰ ਨਾਮ ਆਰਾਮ ਨਾਮ ਜਿਹੜੇ ਹਰ ਹਰ ਰਾਮ ਨਾਮ ਨਾਲ ਬੋਲਦੇ ਨੇ ਉਪਦੇਸ਼ ਕਰਦੇ ਹਾਂ ਹਰ ਲੋਗ ਦਾ ਇਹਨੂੰ ਮੱਥਾ ਉਪਦੇਸ਼ ਕਰ ਜੋ ਬੋਲਣ ਹਰ ਹਾਲ ਰਾਮਨਾਮ ਹਰ ਸਾਥ ਤੇ ਹਰ ਸਾਥ ਉਹ ਅੰਦਰ ਹਰ ਗੱਲ ਕਰਦੇ ਆ ਕਹਿੰਦੇ ਬਾਹਰ ਕੋਈ ਵਿਸ਼ਨੂੰ ਬਾਰੇ ਜਾਂ ਕ੍ਰਿਸ਼ਨ ਬਾਰੇ ਹਾਲ ਨਾ ਸਮਝ ਲਿਓ ਹਮੇਸ਼ਾ ਰਹਿਣ ਵਾਲਾ ਹਰ ਹੈ ਉਸ ਦੀ ਗੱਲ ਕਰਦੇ ਆ ਯਾਨੀ ਜੋਤ ਦੇ ਲੈਵਲ ਦੀ ਗੱਲ ਕਰਦੇ ਆ ਜਾਤ ਦੇ ਲੈਵਲ ਦੀ ਨਹੀਂ ਕਰਦੇ ਹਾਂ ਜਿਨ ਕਾ ਪੁੱਤ ਪੁੰਨ ਹੈ ਤੇ ਗੁਰਮੁਖ ਸਿੱਖ ਗੁਰੂ ਪਹਿਜਾਤੇ ਪੁੱਤਾ ਹੁੰਦਾ ਕਿ ਜਿੱਤੇ ਹੋਰ ਪੁੱਤਾ ਫੇਰ ਦੇਣਾ ਫੇਰ ਦੇਣਾ ਦੂਜੇ ਤੇ ਪੁੱਤਾ ਫੇਰ ਦੇ ਹੁੰਦੇ ਨੇ ਜਿਹੜਾ ਕਾਲਾ ਹੁੰਦਾ ਉਹਤੇ ਪਾਂਡੂ ਫੇਰਤਾ ਉਹਨੂੰ ਪੁੱਤਾ ਕਹਿੰਦੇ ਕਿਸੇ ਦੇ ਅਰਿਆਂਤਾ ਗਿਆਨ ਪੁੱਤ ਦੇਣਾ ਅੱਛਾ ਜੀ ਕਿਸੇ ਦਾ ਭਰਮ ਦੂਰ ਕਰ ਦੇਣਾ ਪੁੱਤ ਪੁੰਨ ਹੈ ਉਹ ਪੁੰਨ ਦਾ ਪੁੱਤ ਹੈ ਪੁੰਨ ਕੀ ਹੁੰਦਾ ਕਲਮੇ ਉਹ ਗੁਣ ਗੋਬਿੰਦ ਹੋ ਬਿੰਦ ਗੋਬਿੰਦ ਗਾ ਕੇ ਗੋਬਿੰਦ ਨੂੰ ਸਮਝਾ ਕੇ ਉਹਨਾਂ ਦੇ ਉੱਤੇ ਉਹਨਾਂ ਦਾ ਪਰਬ ਦੂਰ ਕਰ ਦੇਣਾ। ਜਾਨ ਦੇ ਕੇ ਉਹਨਾਂ ਦਾ ਫਜ਼ਲਤਾ ਦੂਰ ਕਰ ਦੇਣਾ। ਇਹ ਤੇ ਪੁਣ ਹੈ। ਠੀਕ ਹੈ ਸੇ ਗੁਰੂ ਆਪਣੇ ਸਿੱਖ ਗੁਰੂ ਪਹਿ ਜਾਂਦੇ। ਜਿਹੜੇ ਗੁਰਮੁਖ ਸਿੱਖ ਗੁਰੂ ਕੋਲ ਜਾਂਦੇ ਨੇ ਜਿਹੜੇ ਸ਼ਬਦ ਗੁਰੂ ਨਾਲ ਜੁੜ ਕੇ ਉਪਦੇਸ਼ ਕਰਦੇ ਨੇ ਅੰਤਰਾਤਮਾ ਨਾਲ ਜੁੜ ਕੇ ਉਪਦੇਸ਼ ਕਰਦੇ ਨੇ। ਉਹ ਕੋ ਉਪਦੇਸ਼ ਕਰਦੇ ਸਨ ਆ ਆਤਮਾ ਦੀ ਪਹੁੰਚ ਗੁਰੂ ਤੱਕ ਹੁੰਦੀ ਹੈ ਪਰਮੇਸ਼ਰ ਤੱਕ ਜਰੂਰ ਉੱਥੋਂ ਪੋਤੇ ਪੁੰਨ ਹੈ ਨੇ ਇਹੋ ਦਾ ਪੋਤਾ ਕਿਸੇ ਪਰ ਲਾਇਆ ਹੈ ਉਹ ਗੁਰਸਿੱਖ ਜਿਹੜੇ ਹੈ ਉਹ ਗੁਰੂ ਕੋਲ ਜਾਣਦੇ ਆ ਫਿਰ ਜਿਹੜੇ ਐਸਾ ਪੁੰਨ ਕਰਦੇ ਨੇ ਪਰਮ ਦੂਰ ਕਰਦੇ ਨੇ ਉਹਨਾਂ ਦੇ ਗੁਰੂ ਤੱਕ ਅਪਰੋਚ ਹੋ ਜਾਂਦੀ ਹੈ ਠੀਕ ਹੈ ਗੁਰੂ ਕੋਲ ਅਪਰੋਚ ਹੋਏ ਤੇ ਬਿਨਾਂ ਇਹ ਪਰਪੇਣ ਸਕਦਾ ਗੁਰਬਾਣੀ ਸ਼ਬਦ ਗੁਰੂ ਨਾਲ ਜੁੜੇ ਤੇ ਬਿਨਾਂ ਨਾਮ ਨਾਲ ਜੁੜੇ ਤੇ ਇਹ ਕਥਨ ਹੋ ਸਕਦਾ ਕਹਿਣ ਦਾ ਭਾਵ ਇਹ ਉਹੀ ਗੁਰਮੁਖ ਹੈ ਉਹੀ ਸਿੱਖ ਉਹਨਾਂ ਦੀ ਸੁਰਤ ਸ਼ਬਦ ਤੱਕ ਪਹੁੰਚ ਜਾਂਦੀ ਹੈ ਉਹਨਾਂ ਦੀ ਸੁਰਤ ਦਾ ਸ਼ਬਦ ਨਾਲ ਮੇਲ ਹੋ ਕੇ ਵੀ ਉਹ ਗੱਲ ਕਰਦੇ ਠੀਕ ਹੈ ਜੀ ਇੱਥੇ 16ਵੇਂ ਪਾਉਡਰੀ ਦੀ ਸਮਾਪਤੀ ਹੈ ਜੀ ਜੀ